ਵਾਵਾ ਅਖਰ ਤੋਂ ਚਾਰੇ ਬਾਣੀਆਂ ਦਾ ਉਪਦੇਸ਼ ਹੈਗਾ ਜੀ ਪਹਿਲਾ ਭਗਤ ਕਬੀਰ ਜੀ ਨੇ ਦੋ ਪੌੜੀਆਂ ਚ ਉਪਦੇਸ਼ ਦਿੱਤਾ ਜੀ ਪੌੜੀ 37 ਤੇ ਪੌੜੀ 38 ਜੀ ਪੰਤੀ ਨੰਬਰ ਪੌੜੀ 'ਚ ਕਬੀਰ ਜੀ ਕਹਿੰਦੇ ਆ ਜੀ ਵਾਵਾ ਬਾਰ-ਬਾਰ ਬਿਸਨਸ ਸਮਾਰ ਬਿਸਨਸ ਸਮਾਰ ਨਾ ਆਵੇ ਹਾਰ ਬਾਰ-ਬਾਰ ਵਾਵਾ ਜਿਹੜਾ ਫਿਸਰ ਰਹਿਣਾ ਭਾਇਆ ਤੋਂ ਅਲੱਗ ਮਾਇਆ ਦੇ ਸੁਣਿਆ ਹੋਇਆ ਨੇ ਉਹਨੂੰ ਸਮਾਲ ਲੈ ਉਹਨੂੰ ਖੋਜ ਲੈ ਸੋਧ ਲੈ ਸੋਧ ਲੈ ਖੋਦ ਲੈ ਸੋਧ ਸੋਧ ਲੈ ਗਈ ਨੇ ਫਿਰ ਇਸਨੂੰ ਕੋਣ ਮਾਇਆ ਦੇ ਵਿੱਚ ਲਿਪਕੀ ਹੁੰਦਾ ਉਹਨੂੰ ਕਿਸਨ ਕਹਿਣਾ ਮਾਇਆ ਤੋਂ ਅਲਿਫ ਉਹ ਕਿਸਨ ਮਾਇਆ ਦਾ ਬਹੁਤ ਅਕਪਰੀ ਉਹਦੇ ਵਿੱਚ ਹੈ अच्छा ए फिर अपना मूल होया जी हां बल बल जे बिसन तना जस गावै बिसन मिले सब ही सच पावै हां ओदे बलहारी जाणियां बल बल जे बिषा तना जस गावै बिसन तना बिसन दा जेड़ा होके बिसन दा गावे अपने मूल दा करे ਬਿਸ਼ਨ ਦੇ ਨਾਲ ਸਮੁੰਦਰ ਤੋਂ ਤੇਸ਼ਰ ਦੇ ਤੰਗਾ ਬਿਸ਼ਨ ਦੇ ਤੰਗਾ ਜਸ ਕਰੇ ਜੋ ਬਿਸ਼ਨ ਹੈ ਬਿਸ਼ਨ ਦਾ ਜਸ ਕਰੇ ਮਾਇਆ ਦਾ ਜਸਾ ਕਰੇ ਜਸ ਕਾਵਾ ਹੈ ਵਿਸ਼ਨ ਮਿਲੇ ਸਭ ਹੀ ਸੱਚ ਪਾਵੈ ਮਿਲ ਜਾਂਦਾ ਤੂ ਤੂ ਕਰਤਾ ਪਿਆਪੁਰ ਦੀ ਰਾਹ ਨੂੰ ਤਾਂ ਰੂਪ ਹੋ ਜਾਂਦਾ ਉਹ ਸਭ ਹੀ ਸੱਚ ਪਾਵ ਸਾਰੇ ਸਤਿ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰ ਪ੍ਰਸਾਦਿ ਤੱਕ ਸਭ ਹੋ ਸਾਰਾ ਤੱਕ ਹੋ ਗਿਆ ਸਾਡਾ ਪਾਲਿਆ ਠੀਕ ਹੈ ਜੀ ਉਪਰ ਬੱਬੇ ਨਾਲ ਲਿਖਿਆ ਸੀ ਬਿਸਨ ਏਥੇ ਵਾਵੇ ਨਾਲ ਲਿਖਿਆ ਹੈ ਤਾਂ ਇਹਨਾਂ ਦਾ ਬੱਬਾ ਵਾਵਾ ਗੁਰਬਾਣੀ ਵਿੱਚ ਇੱਕੇ ਭਾਵ ਰੱਖਦੇ ਹਨ ਜੀ ਉੱਥੇ ਬਿਸਨਸ ਮਾਰ ਸੀਗਾ ਇੱਥੇ ਹੈਗਾ ਮਿਲੇ ਹਾਂ ਹਾਂ ਉਹਨਾਂ ਜੀ 38ਵੀਂ ਦਾ ਉਪਦੇਸ਼ ਭਗਤ ਕਬੀਰ ਜੀ ਦੀ ਬਾਵਨ ਅਖਰੀ ਤੇ ਉਹਨਾਂ ਦਾ ਗਾਂ ਅੱਗੇ ਡਾਲੇ ਅਖਰ ਤੋਂ ਕੋਈ ਵਿਦੇਸ਼ ਨੀ ਹੈ ਉਹਨਾਂ ਦਾ ਭਾਵਨ ਅਖਰੀ ਅਖੀਰ ਲੀ ਪੌੜੀ ਹੈ ਜੀ ਵਾ ਵਾ ਵਾਹੀ ਵਾ ਜਾਣੇ ਇਹ ਹੋਏ ਕੋਈ ਵਾਵੇ ਅਕਰਦਵਾ ਕੇ ਵਾਹੀ ਜਾਣੀ ਹੈ ਉਹਨੂੰ ਜਾਣੂ ਯੂ ਨੂੰ ਜਾਣੋ ਜੀ ਤੋ ਇਹ ਫਾਇਦਾ ਹੈ ਉਹਨੂੰ ਜਾਣ ਵਾ ਜਾਣੇ ਉਹਦੇ ਜਾਣਦੇ ਸੇ ਕੀ ਹੋਊਗਾ ਏ ਆਰ ਉਹ ਜਦ ਮੈਨੇ ਮਿਲਦਣ ਜਾਣੇ ਕੋਏ ਬਾਜਾ ਜਾਣਿਆ ਜਾ ਉਹ ਇਹ ਅਰੋ ਦੋਏ ਵਰ ਜਾਣਗੇ ਮਾਨ ਰਚੇ ਟਿਕ ਹੋ ਜਾਣਗੇ ਜਦ ਇੱਕ ਹੋਣਗੇ ਮਿਲਣਗੇ ਕਿਸੇ ਨੂੰ ਪਤਾ ਨਹੀਂ ਲੱਗਣਾ ਮੇਰੇ ਤਨ ਜਾਣੇ ਆਵਾਜ਼ ਨਹੀਂ ਆਉਣੀ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਮਿਲ ਕੇ ਠੀਕ ਹੈ ਜੀ ਵਾ ਵਾਹੀ ਜਾਣੀਏ ਵਾ ਜਾਣੇ ਇਹ ਹੋਏ ਵਾ ਮਤਲਬ ਉਹਨੂੰ ਜਾਣੀਏ ਹੈ ਇਹੇ ਅਰ ਉਹ ਮਿਲਾਂ ਹੈ ਯਾਰ ਤਬ ਮਿਲਤ ਨਾ ਜਾਣੇ ਕੋਈ ਕੇ ਰੋੜੀ ਪਤਾ ਲੱਗਣਾ ਚਾਹ ਬਣਨਾ ਦੋਸ ਅੱਛਾ ਜੀ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਬੈਦਮੂਆ ਰੋਗੀ ਮੂਆ ਮੂਆ ਸਭ ਨਾ ਮੂਆ ਅੱਜ ਸੁਣਾ ਏਕ ਹੋ ਕੇ ਮਿਲਦੇ ਆਪਸ ਉਹ ਫਿਰ ਪਤਾ ਨਹੀਂ ਲੱਗਦਾ ਜੀ ਤੁਹਾਡਾ ਨਿਮਨ ਲਗਾਇਆ ਲੋਕ ਦਾ ਬਕਾਣਾ ਲਾਇਆ ਹੁਣ ਵੀ ਵਨ ਵਰ ਗਿਆ ਉਹ ਨਹੀਂ ਕੋਈ ਦਾਦਾ ਜਿਹੜਾ ਲੈਵਰੀਨ ਹੋਇਆ ਸੰਤ ਸਾਡਾ ਉਹ ਵਰਸੀ ਆ ਟਾਈਮ ਦੀ ਕੋਈ ਦਾਦਾ ਇੱਕ ਨਵੀਂ ਮੂਵੀ ਆਈ ਹੈ ਜੀ ਓ ਮਾਈ ਮਰੇ ਤੋਂ ਆਤਮਾ ਕਿਉਂ ਸ਼ਾਂਤ ਹੋ ਜਾਂਦੀ ਹੈ ਜਿਉਂਦੀ ਜਿਉਂਦੀ ਕਿਉਂ ਨਹੀਂ ਹੁੰਦੀ ਹੈ ਹਾਂ ਇਹ ਬਹੁਤ ਵੱਡਾ ਸਵਾਲ ਹੈ ਸਾਰੇ ਮਰੇ ਤੋਂ ਕਹਿੰਦੇ ਆਤਮਾ ਦੀ ਸ਼ਾਂਤੀ ਜਿਉਂਦੀ ਜਿਆਦਾ ਤਾਂ ਸੀ ਉਹ ਆਹ ਇਹ ਰਵੀਆਂ ਜੀ ਆ ਸ਼ਾਂਤ ਰੱਖ ਦਿੰਦੀਆਂ ਜਿਹੜੀਆਂ ਮੱਤਾਂ ਨੇ ਦੁਨੀਆਂ ਨੂੰ ਉਸ਼ਾਂਤ ਰੱਖਣਾ ਉਹ ਸ਼ਾਂਤ ਨਹੀਂ ਹੋਣਗੇ ਆਪ ਠੀਕ ਹੈ ਜੀ ਹੁਣ ਇਹ ਜੀ ਗੁਰੂ ਨਾਨਕ ਸਾਹਿਬ ਵੱਲੋਂ 32ਵੀਂ ਪੌੜੀ ਦਾ ਉਪਦੇਸ਼ ਹੈ ਜੀ ਵਭ ਵਾਸੂ ਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਇਹ ਤੀਨੂ ਦੇਖਣ ਵਾਸਤੇ ਬਣਾਇਆ ਤਾਂ ਕਿ ਆਪਣੇ ਮੂਲ ਨੂੰ ਦੇਖ ਸਕੇ ਇਹ ਹੀ ਦੇਖ ਆਪਣੇ ਆਪ ਨੂੰ ਦੇਖਣ ਵਾਸਤੇ ਬਣਾਇਆ ਹੈ ਅੰਨੇ ਬੋਲਿਆਂ ਨੂੰ ਕੰਨਾਂ ਨੂੰ ਲੱਗਾ ਸੂਤ ਕਿਵੇਂ ਦੇਖੇ ਹੁਣ ਉਹਨਾਂ ਦੀਆਂ ਅੱਖਾਂ ਠੀਕ ਕਰਨੀ ਕੱਲ ਠੀਕ ਕਰ ਨੇ ਜੀਭਾ ਸੂਤ ਇਹ ਠੀਕ ਕਰਨ ਵਾਸਤੇ ਆ ਗਿਆ ਹੈ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਇਨੂੰ ਆਪਣਾ ਆਪ ਦੇਖਣ ਵਾਸਤੇ ਮਿਲੀ ਸੀ ਹਾਂਜੀ ਆਪਣਾ ਆਪ ਦੇਖਣ ਦਾ ਅੰਨੇ ਅੰਨੇ ਬੋਲੇ ਹੋਗੇ ਨਾ ਉਹ ਵਾਸੇ ਪਰਮੇਸ਼ਰ ਦੇਖਣ ਵਾਸਤੇ ਸੇਸ਼ੀ ਰੱਖਿਆ ਅੰਧਿਆਂ ਨੂੰ ਅੱਖਾਂ ਦੇਣ ਲਈ ਇੱਥੇ ਦੇਣ ਵਾਸਤੇ ਕੀਤਾ ਹੈ ਹਾਂਜੀ ਤੇ ਬਹਿਰਿਆਂ ਨੂੰ ਕੰਨ ਮਿਲਨੇ ਹੈ ਜੀ ਵਾਹ ਬਹਿਰਿਆਂ ਨੂੰ ਕਾਨੂੰ ਵੇਖੇ ਚਾਖੇ ਸਭ ਕੁਝ ਜਾਣੈ ਅੰਦਰ ਬਾਹਰ ਰਬ ਰਹਾ ਹੈ ਵੇਖ ਕੇ ਜਾਣ ਕੇ ਸਭ ਕੁਝ ਜਾਣਦਾ ਉਹ ਆਪ ਤਾਂ ਵੇਖਦਾ ਹੈ ਸਾਰੇ ਨੂੰ ਸਮਝਦਾ ਵੀ ਹੈ ਅੰਦਰੋਂ ਵਾਹ ਰੱਬ ਨੂੰ ਸਾਰਿਆਂ ਦੇ ਅੰਦਰ ਵੀ ਹੈ ਬਾਹਰ ਵੀ ਹੈ ਬਾਹਰੋਂ ਵੀ ਜਾਣਦਾ ਅੰਦਰੋਂ ਵੀ ਜਾਣਦਾ ਸਭ ਕੁਝ ਜਾਣਦਾ ਹੋ ਦੇਖਦਾ ਵੀ ਹੈ ਇਹਨਾਂ ਦਾ ਧਿਆਨ ਵੀ ਰੱਖਦਾ ਹੈ ਸਭ ਕੁਝ ਜਾਣਦਾ ਵੀ ਹੈ ਵੀ ਕਿਹਨੂੰ ਲੋੜ ਹੈ ਕੀ ਨਹੀਂ ਲੋੜ ਜੇ ਬੋਲਨੇ ਸਭ ਕੁਝ ਜਾਣਦਾ ਹੋ ਇਸ ਕਰਕੇ ਬਾਹਰ ਵੀ ਇਹਨਾਂ ਦੇ ਅੰਦਰਲੀ ਅਵਸਥਾ ਨੂੰ ਵੀ ਜਾਣਦਾ ਹੈ ਬਾਹਰਲੀ ਨੂੰ ਵੀ ਜਾਣਦਾ ਹੈ ਅੰਦਰ ਬਾਹਰ ਰਵ ਰਹਿਆ ਅੰਦਰਲੀਆਂ ਬਿਮਾਰੀਆਂ ਦਾ ਵੀ ਇਲਾਜ ਕਰਦਾ ਭੁੱਖ ਦਾ ਇਲਾਜ ਵੀ ਕਰਦਾ ਹੈ ਥੱਲੇ ਦਰਦ ਦਾ ਦੋਹਾਂ ਚੀਜ਼ਾਂ ਦਾ ਇਲਾਜ ਕਰਦਾ ਆਤਮਾ ਦੀ ਭੁੱਖ ਦਾ ਇਲਾਜ ਕਰਦਾ ਸਰੀਰ ਦੀ ਭੁੱਖ ਦਾ ਵੀ ਇਲਾਜ ਕਰਦਾ ਠੀਕ ਹੈ ਜੀ ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜੀ ਹੁਣ ਗੁਰੂ ਅਮਰਦਾਸ ਜੀ ਵੱਲੋਂ 12ਵੀਂ ਪੌੜੀ 'ਚ ਉਪਦੇਸ਼ ਹੈ ਜੀ ਵੱ ਵਾਰੀ ਆਈ ਐ ਮੂੜੇ ਵਾਸੂ ਦੇਉ ਤੁਦ ਵਿਸਰਿਆ ਆਈ ਐ ਮਨੁੱਖਾ ਜਨਮ ਆਇਆ ਵਾਸਦੇ ਵਾਰੀ ਨਾ ਮਿਲੂਗੀ ਜੇ ਵਿਸਰੇ ਖਾਲੀ ਚਲੀ ਜਾਊਗੀ ਜਨਮ ਇਸ ਪਰ ਜਾਊਗਾ ਜੇ ਵਾਸਦੇ ਵਿਸਰਾ ਰਿਹਾ ਹੋਜੀ ਵੇਲਾ ਨਾ ਲਹਸੈ ਮੂੜੇ ਫਿਰ ਤੂੰ ਜਮ ਕੇ ਵਸ ਪਇਆ ਆਵੇ ਦੇਲਾ ਫੈਲੀ ਹੋਣਾ ਫਿਰ ਜੰਮਦੇ ਆ। ਕੋਈ ਜੰਮ ਕੇ ਬਸ ਤੇ ਆ ਫਿਰ ਜੰਮਦੇ ਬਸ ਤੇ। ਠੀਕ ਹੈ ਸ਼ਬਦ ਵਰਤਿਆ ਇੱਥੇ ਅੱਛਾ ਤਾਂ ਵਾਵੇ ਵਾਸ ਦਿਓ ਪਰਮੇਸ਼ਰ ਵੇਖਣ ਕੋਪ ਜਿਹੜਾ ਪਰਮੇਸ਼ਰ ਨੇ ਵਾਸੂ ਦਿਓ ਨੂੰ ਇੱਥੇ ਭੇਜਿਆ ਇਹਨੇ ਆਪਣਾ ਮੂਲ ਵੇਖਣਾ ਸੀ ਤਾਂ ਇਹਨੇ ਵੇਸ ਦਿੱਤਾ ਸੀ ਹਾਂਜੀ। ਹਾਂਜੀ ਹਾਂ। ਰਚਨਾ ਪਰਮੇਸ਼ਰ ਨੇ ਕੀਤੀ ਹੈ ਪਰ ਰਚਿਆ ਵਿੱਚ ਆ ਕੇ ਵਾਸ਼ ਦੇਵ ਹੈ ਵਾਸ਼ ਵਾਸਦੇ ਵਾਸਦੇ ਉਹ ਤਾਂ ਕਹਿੰਦੇ ਨੇ ਮਾਨੂੰ ਅੱਡ ਕਰਕੇ ਆਪਣੇ ਆਪ ਕਿ ਫੇਰ ਦੇ ਅੱਛਾ ਜੀ ਤੇ ਵੈਸੇ ਤਾਂ ਇਹਨੂੰ ਕ੍ਰਿਸ਼ਨ ਦਾ ਪਿਤਾ ਵੀ ਕਹਿੰਦੇ ਹਨ ਜੀ ਹਾਂ ਜੀ ਹਾਂ ਜੀ ਕ੍ਰਿਸ਼ਨ ਦਾ ਪਿਤਾ ਜਿਹੜਾ ਵਾਸਦੇ ਹੈ ਕ੍ਰਿਸ਼ਨ ਨੂੰ ਨੇ ਆਪਣੇ ਅੰਦਰ ਨਿਵਾਸ ਦੇਣਾ ਹੈ ਜੀ ਹਾਂ ਉਹ ਕਹਿੰਦੇ ਆਪਣੇ ਅੰਦਰ ਨਿਵਾਸ ਦੇਣਾ ਪਰ ਇਹ ਆਪਣਾ ਮੂਲ ਹੋਯਾ ਤਾ ਏ ਰਾਮ ਵੀ ਹੋਇਆ ਸਾਡਾ ਤਾਂ ਗੁਰਮਤਿ ਵਿੱਚ ਤਾਂ ਕੋਈ ਗੱਲ ਹੈ ਰਾਮ ਵੀ ਹੋਇਆ ਠੀਕ ਗੱਲ ਦਾ ਨਹੀਂ ਪਤਾ ਕਿ ਰਾਮ ਵਾਸੂਦੇਵ ਹੈ ਪਰ ਸਾਡਾ ਰਾਮ ਔਰ ਵਾਸੂਦੇਵ ਕੋਈ ਇੱਕ ਦੋ ਕਹਿੰਦਾ ਦੇ ਇਹ ਜਿਹੇ ਕੰਮ ਇਹ ਆਪਾਂ ਇਹ ਤੋਂ ਬਾਅਦ ਫਿਰ ਸਾਸਕ੍ਰਿਤੀ ਸ਼ਲੋਕ ਵੀ ਕਰਨੇ ਉਹਦੇ ਵਿੱਚ ਵੀ ਪਹਿਲੇ ਸ਼ਲੋਕ 'ਚ ਆ ਜਾਣਾ ਜੀ ਜੀ ਹੁਣ ਹੈ ਜੀ ਉਪਦੇਸ਼ ਗੋੜੀ 52 ਅਖਰੀ ਮਹਲਾ ਪੰਜਮਾ ਚ ਹਾਂਜੀ 40ਵੀਂ ਪਉੜੀ ਦਾ ਉਪਦੇਸ਼ ਹੈ ਜੀ ਪਉੜੀ ਵਵ ਵੈਰ ਨਾ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਵ ਵੈਰ ਨਾ ਕਰੀਏ ਕਾਹੂ ਕਿਹੜਾ ਨੈਵਰ ਨਹੀਂ ਕਰਨਾ ਚਾਹੀਦਾ ਕਿਉਂਕਿ ਘਟ ਘਟ ਸਾਰਿਆਂ ਦੇ ਅੰਦਰ ਬ੍ਰਹਮ ਸਮਾਇਆ ਹੋਇਆ ਬ੍ਰਹਮ ਨਾਲ ਨਹੀਂ ਵੈਰ ਕਰ ਸਕਦੇ ਆਪਣ ਬ੍ਰਹਮ ਦਾ ਸਾਰਿਆ ਦੇ ਅੰਦਰ ਹੈ ਵਹਿਰ ਕੀ ਦੇ ਕਰਨਾ ਸਾਡੀ ਮਜਬੂਰੀ ਹੈ ਵਹਿਰ ਨਾ ਕਰਨਾ ਕਿਉਂਕਿ ਸਾਡੀ ਮਜਬੂਰੀ ਹੈ ਅੱਡੀ ਕਰ ਸਕਦੇ ਕਿਉਂਕਿ ਸਾਰਿਆਂ ਦੇ ਬ੍ਰਹਮ ਸਮਾਇਆ ਹੋਇਆ ਹੈ ਦੇ ਨਾਲ ਬਹਿਦੀ ਕੀਤਾ ਜਾ ਸਕਦਾ ਬ੍ਰਹਮਣਾ ਵਹਿਰ ਕਰਨਾ ਤਾਂ ਆਪਣੇ ਪੈਰ ਕੋੜਾ ਮਾਜ਼ ਤੱਲ ਆਪਾਂ ਨੂੰ ਸੀ ਜੀ 42ਵੀਂ 'ਚ ਹੀ ਪੂਰਨ ਘਟ ਘਟ ਪੁਰਖ ਵਿਸ਼ੇਖਾ ਤੇ ਸਿਆਰੀ ਚਾਹੀਦੀ ਸੀ ਪਰ ਆਜ ਜਿਹੜਾ ਆਪਾਂ ਹੁਣ ਕਰ ਰਹੇ ਆਂ ਸ਼ਬਦ ਲੱਗ ਗਿਆ ਕਰਕੇ ਸਿਆਰੀ ਦੀ ਲੋੜ ਨਹੀਂ ਹੈ ਅੰਤਰ ਤੇ ਸਿਆਰੀ ਹੈ ਘਟ ਘਟ ਅੰਤ ਜਿਹਾ ਭਾਵ ਹੈ ਵੀ ਇਹ ਠੀਕ ਲਿਖਿਆ ਉੱਥੇ ਸਿਆਰੀ ਚਾਹੀਦੀ ਹੈ ਘਟ ਘਟ ਅੰਤਰੀ ਬ੍ਰਹਮ ਸਮਾਹੂ ਆਹ ਘਟ ਘਟ ਉਹ ਖੁੱਲ ਆ ਅੰਤਰੀ ਲੱਗ ਗਿਆ ਹੈ ਨਹੀਂ ਸੀ ਉੱਥੇ ਹੈ ਨਹੀਂ ਠੀਕ ਹੈ ਜੀ ਵਾਸੂਦੇਵ ਜਲ ਥਲ ਮਹਿ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਵਿਆ। ਬਾਬਾ ਦੇਵ ਜੱਲ ਥਾਲਵੇਂ ਰਵਿਆ ਬਾਬਾ ਦੇਵ ਤਾਂ ਥਾਲ ਵਿੱਚ ਵੀ ਖਾਏ ਰਵਿਆ ਹੈ। ਗੁਰਪ੍ਰਸਾਦ ਬਿਲ ਨਹੀਂ ਗਵਿਆ। ਗਿਆਨ ਦੀ ਕਿਰਪਾ ਨਾਲ ਬਿਲ ਨਹੀਂ ਇਹ ਸਭ ਇਹ। বুঝਿਆ? বুঝਿਆ ਕਿ ਸੱਦ ਬਿਲ ਨੇ ਜਿਹਨੂੰ ਗਿਆਨ ਬਣਲੇ ਨਾਲ ਹੋ ਰਵਿਆ ਹੋਇਆ ਜੱਲ ਥਾਲ ਸਾਰੇ ਇਥੇ ਵੀ ਵਾਸਦੇਵ ਦਾ ਭਾਵ ਆਪਣਾ ਮੂਲ ਹੀ ਹੈ ਹਾਂਜੀ ਹਾਂਜੀ ਠੀਕ ਹੈ ਸਕਾਰ ਰੂਪ ਵਿੱਚ ਜਲ ਚ ਵੀ ਤੇ ਥਲ ਚ ਦੇ ਜੀਵਾਂ ਚ ਹੈਗਾ ਹਾਂਜੀ ਹਾਂ ਜੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮਖੀ ਜੋ ਸੁਣਤੇ ਵੈਰ ਵਿਰੋਧ ਵਿਟੇ ਤੇ ਤਾਂ ਹੁੰਤੇ ਉਹਦੇ ਮਨ ਹਰ ਕੀਰਤਨ ਗੁਰਮੁਖ ਜੋ ਸੁਣਦੇ ਜਿਹੜੇ ਗੁਰਮੁਖਾਂ ਕੀਰਤਨ ਨੇ ਗੁਰਬਾਣੀ ਨੂੰ ਗੌਰ ਨਾਲ ਸੱਚ ਤੇ ਤੇ ਕੋਈ ਪੰਕਤੀ ਇਹਨਾਂ ਨੂੰ ਮਾਣ ਕੇ ਰੱਖ ਲੂ ਨੂੰ ਕੋਈ ਨਹੀਂ ਸੁਣ ਰਿਹਾ ਇਹਨੇ ਇਹ ਜੇ ਸੁਣਦੇ ਤਾਂ ਬੈਰ ਵਿਰੋਧ ਮਿਟ ਜਾਂਦੇ ਸੀ ਜੇ ਨਹੀਂ ਮਿਟੇ ਤਾਂ ਸੁਣਿਆ ਨਹੀਂ ਹੈ ਇਕ ਕੋਈ ਬੰਦੀ ਆ ਸਾਹ ਇਹਨਾਂ ਨੂੰ ਕਿਸੇ ਕੋ ਜਵਾਬ ਦੇ ਕੋ ਕੋਈ ਦੇ ਅਪਰਾਧੀ ਸਿੱਖ ਕੌਣ ਦੇ ਅਪਰਾਧੀ ਨੇ? ਵੱਡੇ ਵੱਡੇ ਅਪਰਾਧੀ ਸਿੱਖ ਨੇ ਆਪਣਾ। ਵੈਰ ਬੋਧ ਗੁਰਮੁਖ ਹੋ ਕੇ ਹਰ ਕੀਰਤਨ ਸੁਣਿਆ ਸਰਕਾਰ ਜਿਮ ਕੌਣ ਨੇ ਹਰ ਗਾਲੇ ਚ ਆਪਣੀ ਉਹ ਦਮਾਲੇ ਪਰ ਨਹੀਂ ਫਿਰਦੇ ਅਸੀਂ ਜੀ ਸਤਕਾਰ ਕਮੇਟੀ ਬਣਾਈ ਆ ਸਤਕਾਰ ਜੰਨਾ ਕਰਦੇ ਕੋਈ ਸਤਕਾਰ ਇਹ ਕੱਖਾਂ ਕੋਈ ਗੁਰਬਾਣੀ ਦਾ ਲੋਕ ਸਭੋ ਇਹ ਕਾ ਕਲ ਲਾਗੇ ਕੀ ਕਰੀ ਵਰਨ ਚੈਨ ਸਗਲੇ ਤੇ ਰਹਤਾ ਨਾਨਕ ਹਰੀ ਹਰੀ ਗੁਰਮੁਖ ਜੋ ਕਹਤਾ ਵਰਣ ਕਰਨ ਉਹ ਤਾਂ ਵਣ ਕਰਨ ਤੋਂ ਅਲੱਗ ਹੈ ਕੋਈ ਵਰਣਾ ਨਾ ਕੋਈ ਚੇਨ ਨਾਲ ਕਹਾਰ ਹਰ ਹਰ ਗੁਰਮੁਖ ਜੋ ਕਹਤਾ ਤਾ ਗੁਰਮੁਖ ਹਰ ਹਰ ਉਹ ਖੁਦ ਵਣ ਕਰਨ ਤੇ ਰਹਿਤ ਹੋ ਜਾਂਦਾ ਹੈ ਖੁਦ ਵਣ ਕਰਨ ਤੇ ਰਹਿਤ ਹੋ ਜਾਂਦਾ ਤਾਂ ਭੇਦ ਨਾ ਜਾਣੋ ਪਰ ਜੋ ਹੁੰਦਾ ਗੁਰਮੁਖ ਉਹਦੇ ਦੇ ਪੈਰ ਕੋਲੋਂ ਕਿਥੋਂ ਆਜੂਗਾ ਦਰਗੋਦ ਨਹੀਂ ਕਰਦੇ ਨੇ ਗੁਰਸਿੰਘ ਭਰੀ ਕਹਿੰਦੇ ਸੀ ਸੇਖਾਂ ਠੀਕ ਜੀ ਤੇ ਇੱਥੇ ਚਲਮੀ ਪੜ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਚਾਰੇ ਬਾਣੀਆਂ ਤੋਂ ਤੇ ਭਗਤ ਕਬੀਰ ਜੀ ਨੇ ਦੱਸਿਆ ਸੀ ਕਿ ਜੋ ਵਿਸਨ ਹੈ ਉਹਨੂੰ ਆਪਾਂ ਸਮਾਰਨਾ ਹੈ ਉਹਨੂੰ ਸੰਭਾਲਣਾ ਨੇ ਵਿਸਨ ਨੂੰ ਸੰਭਾਲ ਲਿਆ ਉਹਦੀ ਗੱਲ ਸੁਣ ਲਈ ਉਹਨਾਂ ਦਾ ਜਨਮ ਸਫਲ ਹੈ ਹਾਂ ਨਾਨਕ ਸਾਹਿਬ ਨੇ ਵਿਸਨ ਨੂੰ ਵਾਸਦੇਵ ਕਿਹਾ ਫਿਰ ਵਾਸਦੇਵ ਦਾ ਇੱਕ ਹੋਣ ਦਾ ਇੱਕੋ ਕਾਰਨ ਹੈਗਾ ਦੁਨੀਆ ਵਿੱਚ ਉਹ ਕਾਰਨ ਲੱਭਣਾ ਹੈ ਤੇ ਉਸ ਕਾਰਨ ਨੂੰ ਲੱਭ ਕੇ ਉਹਦਾ ਫਾਇਦਾ ਉਠਾਉਣਾ ਗੁਰੂ ਅਮਰਦਾਸ ਜੀ ਨੇ ਵੀ ਫਿਰ ਵਾਸਦੇਵ ਦੀ ਉਹ ਗੱਲ ਕੀਤੀ ਹੈ ਬਾਬੇ ਵਾਰੀ ਆਇਆ ਮੂੜੇ ਵਾਸਦੇਵ ਤੁਰੀਸ ਰਿਆ ਆਪਣੇ ਮੂਲ ਨੂੰ ਨਹੀਂ ਭੁਲਾਉਣਾ ਬਿਲਕੁਲ ਪੰਜਵੇਂ ਪਾਤਸ਼ਾਹ ਨੇ ਵੀ ਵਾਸਦੇਵ ਦੀ ਉਹ ਗੱਲ ਕੀਤੀ ਹੈ ਜੀ ਫਿਰ ਬਾਬੇ ਵੈਰ ਨ ਕਰੀਏ ਕਾਉ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮੇ ਰਵਿਆ ਵਾਸਦੇਵ ਆਪਣਾ ਮੂਲ ਹੈ ਇਹਨੂੰ ਕ੍ਰਿਸ਼ਨ ਦਾ ਪਿਤਾ ਵੀ ਕਹਿੰਦੇ ਆ ਕਿਉਂਕਿ ਕ੍ਰਿਸ਼ਨ ਇਹਦੇ ਤੋਂ ਹੀ ਪੈਦਾ ਹੋਇਆ ਸੀ ਮੂਲ ਤੋਂ ਤੇ ਇਹਦੇ ਵਿੱਚ ਹੀ ਸਮਾਏਗਾ ਠੀਕ ਹੈ ਜੀ ਤੇ ਇੱਥੇ ਵਾਵੇ ਅੱਖਰ ਦੇ ਸਮਾਪਤੀ ਹੈ ਜੀ ਹੁਣ ਆਪਣੇ ਕੋਲ ਇਹ ਤੋਂ ਬਾਅਦ ਇੱਕ ਅੱਖਰ ਰਹਿ ਗਿਆ ਉਹ ਹੈਗਾ ਜੀ ਰਾੜ